ਪਰੀਸਾ ਸਿੰਘ ਜੀ ਖਿਮਾਂਦੇ ਜੱਜ ਕਾਂ ਗਲਤੀਆਂ ਮਾਫ ਕਰਨਾ ਹੁਕਮ ਹੋਇਆ ਸੀ ਕਿ ਥੋੜਾ ਜਿਆ ਸੰਤ ਖਜਾਨ ਸਿੰਘਾਂ ਬਾਰੇ ਦੱਸਣਾ ਉਹਨਾਂ ਬਾਰੇ ਵਹਿਜ ਤੁਸੀਂ ਸਾਰੇ ਜਾਣਦੇ ਹੋ ਕਿ ਕਿੰਨੇ ਹੋ ਰੰਗੀਲੇ ਬੰਦੇ ਸਨ ਦਰਸ਼ਨ ਸਿੰਘ ਖਜਾਨ ਸਿੰਘ ਸਦਗੁਰਾਂ ਨੇ ਐਸੀ ਜੋੜੀ ਸਥਾਪਿਤ ਕੀਤੀ ਸੀ ਕਿ ਮੈਂ ਉੱਥੇ ਵੀ ਕਿਹਾ ਸੀ ਇਸ ਟਾਈਮ ਹੀ ਹੋਈ ਸੀ ਗੱਲ ਸਾਡੇ ਪੰਜਾਬੀ ਦਾ ਇੱਕ ਅਖਾਣ ਹੈ ਜੋੜੀਆਂ ਜਗ ਥੋੜੀਆਂ ਨਰੜ ਬਥੇਰੇ ਤੇ ਜੋੜੀਆਂ ਜਿਹੜੀਆਂ ਨਾ ਭਗਵਾਨ ਅਕਾਲਪੁਰਖ ਜਾਂ ਸਤਿਗੁਰੂ ਜੀ ਉਹ ਕਿਧਰੇ ਕਿਧਰੇ ਭੇਜਦੇ ਨੇ ਬਣਾ ਕੇ ਜਿਹੜੇ ਇੰਨੇ ਉਹ ਇਕਮਿਕ ਹੁੰਦੇ ਨੇ ਕਿ ਉਹਨਾਂ ਨੂੰ ਤੁਸੀਂ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ ਇਸੇ ਤਰ੍ਹਾਂ ਹੀ ਦਰਸ਼ਨ ਸਿੰਘ ਖਾਨ ਸਿੰਘਰਾ ਦੀ ਐਸੀ ਜੋੜੀ ਸੀ ਉਹਨਾਂ ਦੀ ਯਾਦ ਵਿੱਚ ਇਹ ਦੋ ਸ਼ਬਦ ਉਹ ਪੜ੍ਹਦੇ ਹੁੰਦੇ ਸਨ ਇਸ ਕਰਕੇ ਮੈਂ ਵੀ ਕੋਸ਼ਿਸ਼ ਕੀਤੀ ਹੈ ਉਹ ਤੇ ਚੀਜ਼ ਨਹੀਂ ਬਣ ਸਕਦੀ ਜੋ ਵੀ ਹੋਵੇ ਜੋ ਸੰਤ ਦਰਸ਼ਨ ਸਿੰਘ ਇੱਕ ਹੂਕ ਲਾਂਦੇ ਸਨ ਜੋ ਉਹਨਾਂ ਦੀ ਆਵਾਜ਼ ਵਿੱਚ ਇੱਕ ਇੱਕ ਖਿੱਚ ਸੀ ਕشش ਸੀ ਇੱਕ ਉਹਨਾਂ ਦੀ ਇੱਕ ਪ੍ਰਮਾਨ ਦੇ ਉੱਤੇ ਇੱਕ सुर ਦੇ ਉੱਤੇ ਹੀ ਲੋਕ ਮਸਤਾਨੇ ਹੋ ਹੋ ਪੈਂਦੇ ਸੀ ਔਰ ਖਜਾਨ ਸਿੰਘ ਦੀ ਗੱਲ ਹੈ ਅਸੀਂ ਕਿ ਉਹ ਨਾਲ ਤਬਲਾ ਇੰਨਾ ਮੁਸ਼ਕਲ ਵਜਾਉਂਦੇ ਸੀ ਰੂਪਕ ਦੇ ਵਿੱਚ ਇੱਕ ਤਾਲ ਲਾ ਦੇਣਾ ਜਬ ਤਾਲ ਲਾ ਦੇਣਾ ਔਰ ਵਿੱਚ ਕੈਰਵਾ ਵੀ ਵਜਾ ਦੇਣਾ ਔਰ ਮੂੰਹ ਤੋਂ ਉਸੇ ਜੋਰ ਨਾਲ ਗਾਈ ਜਾਣਾ ਔਰ ਥੱਲੇ ਤਬਲੇ ਦੇ ਤਾਲ ਬਦਲਦੇ ਰਹਿੰਦੇ ਸਨ ਉਹਨਾਂ ਨੂੰ ਉਹਦਾ ਕੋਈ ਨਹੀਂ ਸੀ ਕੋਈ ਝੱਕਾ ਨਹੀਂ ਸੀ ਉਹਨਾਂ ਨੂੰ ਪੈਂਦਾ ਔਰ ਜਿਹੜੇ ਇਸ ਲਾਈਨ ਦੇ ਵਿੱਚ ਨੇ ਸੰਗੀਤ ਲਾਈਨ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਮੁਸ਼ਕਲ ਕੰਮ ਹੈ ਔਰ ਆਮ ਤੌਰ ਤੇ ਤੁਸੀਂ ਦੇਖਾ ਹੋਵੇਗਾ ਰਾਗੀ ਸੱਜਣ ਤਿੰਨ ਬੈਠਦੇ ਨੇ ਦੋ ਵਾਜਿਆਂ ਵਾਲੇ ਤੇ ਇੱਕ ਤਬਲੇ ਵਾਲਾ ਉਹ ਸੰਤ ਖਜਾਨ ਸਿੰਘ ਜੀ ਨਾਲ ਸਾਥ ਸਾਥੀ ਦਾ ਵੀ ਕੰਮ ਕਰਦੇ ਸਨ ਗਾਉਣ ਵਾਲੇ ਦਾ ਵੀ ਔਰ ਨਾਲ ਤਬਲੇ ਦਾ ਵੀ ਔਰ ਐਸਾ ਗਾਉਂਦੇ ਸੀ ਕਿ ਕਈ ਵਾਰੀ ਉਹ ਇਦਾਂ ਉੱਤੇ ਚੜ ਜਾਂਦੇ ਸੀ ਗਾਉਂਦੇ ਗਾਉਂਦੇ ਇੱਕ ਵਾਰੀ ਮੈਨੂੰ ਯਾਦ ਹੈ ਕਿ ਅਸੀਂ ਪਿੱਛੇ ਬੈਠੇ ਹੋਏ ਸੀ ਸੱਚਵਾਹ ਦੇ ਸਾਹਮਣੇ ਉਹ ਕੀਰਤਨ ਹੋ ਰਿਹਾ ਸੀ ਸੰਤਾਂ ਦੇ ਪਿੱਛੇ ਅਸੀਂ ਬੈਠੇ ਸੀ ਛੋਟੇ ਛੋਟੇ ਸੰਤ ਖਜਾਨ ਸਿੰਘ ਰਾਨਾ ਇੱਕ ਵਾਰੀ ਗਾਉਂਦੇ ਗਾਉਂਦੇ ਸ਼ਬਦ ਪੜ੍ਹੇ ਸੀ ਤੇਰੇ ਦਰਸ਼ਨ ਮਿਟੋ ਖਨੀਆਂ ਵੰਜਾ ਤੇਰੇ ਨਾਮ ਬਿਟੋ ਕਰਵਨ ਤੇ ਲੰਗਰਾਗ ਵਿੱਚ ਔਰ ਉੱਥੇ ਉਹਨਾਂ ਨੇ ਐਸੀ ਇੱਕ ਉੱਤੇ ਜਾ ਕੇ ਰੀ ਕਰਕੇ ਸੁਰ ਲਾਉਂਦੇ ਹੁੰਦੇ ਸੀ ਸਾਹ ਦੇ ਉੱਤੇ ਐਸੇ ਟਿਕੇ ਐਸਾ ਟਿਕਾਓ ਉਹਨਾਂ ਦੀ ਆਵਾਜ਼ ਵਿੱਚ ਸੀ ਐਸਾ ਸੁਰ ਟਿੱਕੇ ਲੱਗਾ ਕਿ ਚਾਰ ਚਫੇਰਿਓਂ ਜਿਵੇਂ ਵਾਯੂ ਮੰਡਲ ਦੇ ਵਿੱਚੋਂ ਸਿਰਫ ਉਹਨਾਂ ਦਾ ਸੋਰੀ ਸੁਣ ਰਿਹਾ ਸੀ ਉਸੇ ਇੱਕ ਸੁਰ ਦੇ ਉੱਤੇ ਮੈਂ ਵੇਖਿਆ ਕਈ ਲੋਕ ਮਸਤਾਨੇ ਹੋ ਗਏ ਕੋਈ ਇਹ ਨਹੀਂ ਵੀ ਕੋਈ ਪਰਮਾਨ ਦਿੱਤਾ ਸੀ ਕੋਈ ਗੁਰਬਾਣੀ ਉਹਨਾਂ ਨੂੰ ਲੋਕਾਂ ਨੂੰ ਕੋਈ ਅਪੀਲ ਕੀਤੀ ਗੁਰਬਾਣੀ ਨੇ ਨਹੀਂ ਇੱਕ ਸੁਰ ਨੇ ਐਸੀ ਅਪੀਲ ਕੀਤੀ ਕਿ ਲੋਕੀ ਮਸਤਾਨੇ ਹੋ ਪਏ ਉੱਥੇ ਦੋ ਵਾਰੀ ਐਸੀ ਸੁਰ ਲੱਗੀ ਉਹਨਾਂ ਦੀ ਕਿ ਉਹਦਾ ਕਹਿਣ ਕਥਨ ਤੋਂ ਵਾਰ ਗੱਲ ਹੁੰਦੀ ਹੈ ਉਹ ਤਾਂ ਦੱਸ ਨਹੀਂ ਸਕਦਾ ਆਦਮੀ ਦੂਸਰੀ ਗੱਲ ਰੰਗੀਲੇ ਤੇ ਉਹ ਬਹੁਤ ਸਨ ਉਹਨਾਂ ਦੇ ਕਈ ਐਸੀਆਂ ਗੱਲਾਂ ਵੀ ਉਹਨਾਂ ਦੇ ਚਾਰਚਵਰੇ ਚੁਰਮਟ ਪਿਆ ਰਹਿੰਦਾ ਹੁੰਦਾ ਸੀ ਸਾਧ ਸੰਗਤ ਦਾ ਕੋਈ ਨਾ ਉਹਨਾਂ ਦੇ ਬਚਨ ਸੁਣਨੇ ਸੰਦਰਸ਼ਨ ਸਿੰਘ ਜਿਹਨੇ ਚੁੱਪ ਸਨ ਪੈਨਬੰਦਗੀ ਕਰਨ ਵਾਲੇ ਵੱਡੇ ਭਰਾਤਾ ਉਹਨਾਂ ਦੇ ਤੇ ਇਹ ਉਹਨਾਂ ਖੁਸ਼ ਤਬੀਅਤ ਖੁਸ਼ ਤਬੀਅਤ ਉਹ ਵੀ ਸਨ ਇਹ ਨਹੀਂ ਵੀ ਉਹ ਕੋਈ ਉਸ ਤਰ੍ਹਾਂ ਸਨ ਉਹ ਵੈਸੇ ਸਾਧੂ ਵਿਰਤੀ ਸੀ ਉਹਨਾਂ ਦੀ ਇਹ ਵੀ ਸਾਧੂ ਸਨ ਪੈਨਬੰਦਗੀ ਕਰਨ ਵਾਲੇ ਸਨ ਪਰ ਨਾਲ ਦੁਨੀਆ ਨੂੰ ਖੁਸ਼ ਵੀ ਬਰਾ ਰੱਖਦੇ ਸੀ ਔਰ ਖਸਾਂਦੇ ਸੀ ਬਹੁਤ ਇਹਨਾਂ ਦਾ ਜਵਾਬ ਹੀ ਨਹੀਂ ਸੀ ਤਬਲਾ ਤੇ ਅਸਾ ਮਤਲਬ ਸਾਡੇ ਉਸਤਾਦ ਅਮਜਦ अली ਖਾਨ ਇੱਕ ਵਾਰੀ ਮੇਰੇ ਕਕੇ ਦਾ ਆਨੰਦ ਕਰ ਜੀ ਸੀ ਤੇ ਉੱਥੇ ਆਏ ਸੱਚ ਪਾ ਦਰਸ਼ਨ ਦੇ ਰਿਹਾ ਸੀ ਦਿੱਲੀ ਮੇਲਾ ਸੀ ਉਹਨਾਂ ਦਾ ਤਬਲਾ ਸੁਣ ਕੇ ਕਰੇ ਬਾਬਾ ਜੀ ਤੋਂ ਇਹ ਬਹੁਤ ਜ਼ਬਰਦਸਤ ਤਬਲਾ ਪਲੇਅਰ ਹੈ ਇਤਨਾ ਅੱਛਾ ਤਬਲਾ हमने ਤਾਂ ਸੁਣਾ ਨਹੀਂ ਹੈ ਕਦੀ ਇਹ ਸਟਾਈਲ ਸਿਖਾਣਾ ਚਾਹੀਏ ਲੋਕੋ ਨੂੰ ਕੈਸਾ ਸਟਾਈਲ ਹੈ इनका बहुत जबरदस्त स्टाईल है जेड़ा ਵੀ ਮਤਲਬ ਉਹਨਾਂ ਦਾ ਤਬਲਾ ਵੱਡੇ ਤੋਂ ਵੱਡਾ ਕਲਾਕਾਰ ਵੀ ਸੁਣਦਾ ਸੀ ਉਹ ਵੀ ਆਸ਼ਿਸ਼ ਕਰਦਾ ਸੀ ਸੁਣ ਕੇ ਵੀ ਐਸੀ ਲੱਗੀ ਔਰ ਐਸਾ ਉਹਨਾਂ ਦੇ ਹੱਥ ਵਿੱਚ ਇੱਕ ਜਾਦੂ ਸੀ ਜਿਸ ਨੂੰ ਮਤਲਬ ਤੁਹਾਨੂੰ ਪਤਾ ਹੀ ਹੈ ਸਾਰਾ ਤੁਸੀਂ ਤੇ ਜਾਣਦੇ ਹੋਰ ਦੁਨੀਆ ਦੇ ਨਹੀਂ ਸੁਣਿਆ ਆਪਾਂ ਤੇ ਸੁਣਿਆ ਹੋਇਆ ਦੂਸਰੀ ਗੱਲ ਉਹਨਾਂ ਦੀ ਕਿ ਖੁਸ਼ ਤਬੀਅਤ ਇਹਨੇ ਆਪੇ ਹੀ ਦੱਸਦੇ ਨੇ ਕਿ ਪਹਿਲੀ ਵਾਰੀ ਸੱਚੇ ਬਾਹਾ ਜਦੋਂ ਗੱਦੀ ਨਸੀਹਨ ਹੋਏ ਨੇ ਸੱਚੇ ਬਾਹਾ ਜੀ ਤੇ ਇਹਨਾਂ ਨਾਲ ਉਹ ਜਾਪਾਨ ਨੂੰ ਗਏ ਜਾਪਾਨ ਨੂੰ ਸੰਦਰਸ਼ਨ ਸਿੰਘ ਖਜਾਨ ਸਿੰਘ ਗੁਰਦੇਵ ਸਿੰਘ ਹਜੂਰੀ ਡਰਾਈਵਰ ਜਿਹੜੇ ਸਨ ਗੁਲਜ਼ਾਰ ਸਿੰਘ ਸੱਚੇ ਪਾਛੇ ਪੰਜ ਜਣੇ ਗਏ ਸੀ ਜਹਾਜ਼ਾਂ ਦੇ ਨੇ ਜਾ ਰਿਆ ਸੀ ਹਾਂਗਕਾਂਗ ਦੇ ਉਤੋਂ ਦੀ ਤੇ ਉੱਥੇ ਧਰਮ ਸੰਮੇਲਨ ਸੀ ਕੋਈ ਧਾਰਮਿਕ ਸਾਧੂ ਲੋਕ ਇਕੱਠੇ ਹੋਏ ਸੀ ਤੇ ਸੱਚੇ ਪਾਛੇ ਨੇ ਜਹਾਜ਼ ਦੇ ਵਿੱਚ ਹੀ ਗੁਲਜ਼ਾਰ ਸਿੰਘ ਨੂੰ ਭੇਜਿਆ ਵੀ ਖਜਾਨ ਸਿੰਘ ਨੂੰ ਬੁਲਾ ਕੇ ਲੈ ਕੇ ਆਓ ਵੀ ਇਹਨੂੰ ਥੋੜਾ ਜਿਹਾ ਗੱਲ ਕਰਨੀ ਹੈ ਨਾਲ ਉਹ ਬੁਲਾ ਕੇ ਲੈ ਕੇ ਆਇਆ ਤੇ ਕਹਿੰਦੇ ਨੇ ਵੀ ਖਜਾਨ ਸਿੰਘ ਗੱਲ ਇਸ ਰਾਂ ਵੀ ਤੂੰ ਜਰਾ ਤੇਰਾ ਸੁਭਾਅ ਬੜਾ ਰੰਗੀਲਾ ਤੇ ਤੂੰ ਉੱਥੇ ਜਾ ਕੇ ਨਾ ਕੋਈ ਗੱਲਾਂ ਬਾਤਾਂ ਵੱਧ ਘਾਟੀ ਨਹੀਂ ਕਰਨੀਆਂ ਕਿ ਪੈਨ ਜਿਆਦਾ ਕਰਨਾ ਕਿ ਉੱਥੇ ਲੋਕ ਜਿਹੜੇ ਨੇ ਸਾਰੇ ਧਾਰਮਿਕ ਲੋਗ ਆਏ ਹੋਣੇ ਨੇ ਤੇ ਤੂੰ ਹੱਸੇ ਖੇਡੇਗਾ ਤੇ ਲੋਕੀ ਕੋਈ ਅਸਰ ਠੀਕ ਨਹੀਂ ਪਾਏਗਾ ਅੰਦੇ ਜੀ ਸੱਚੇ ਵਾਹੇ ਤੂੰ ਇਹ ਕਿਰਪਾ ਕਰੋ ਮੈਨੂੰ ਇੱਥੇ ਉਤਾਰ ਦਿਓ ਜਾ ਜੋੜੀ ਦੇ ਚ ਕਿੰਨੇ ਮੈਨੂੰ ਇੱਥੇ ਉਤਾਰ ਦਿਓ ਮੈਂ ਜਿਹੜਾ ਉੱਥੇ ਮੁੰਡਾ ਮੰਗਿਆ ਹੋਇਆ ਮੇਰਾ ਜਾਣਾ ਜ਼ਰੂਰੀ ਜਾਂਦਾ ਸੱਚੇ ਵਾਹੇ ਇਸ਼ਾਰਾ ਕੀਤਾ ਜਾ ਜਾ ਤੂੰ ਆਪਣੇ ਹੱਥ ਤੋਂ ਬਾਝ ਨਹੀਂ ਹੋਣਾ ਉਹ ਇਦਾਂ ਦੇ ਸੀ ਬਹੁਤ ਹੀ ਮਤਲਬ ਖੁਸ਼ ਤਬੀਅਤ ਔਰ ਬੜੇ ਬਚਨ ਬਰਸ ਕਰਨੇ ਸਗੁਰਾਂ ਨੂੰ ਹਸਾਣਾ ਸੰਗਤ ਨੂੰ ਹਸਾਣਾ ਉਹਨਾਂ ਦਾ ਜਵਾਬ ਨਹੀਂ ਉਹਨਾਂ ਦੇ ਮੂੰਹ ਤੇ ਕੋਈ ਵੀ ਉਹਨਾਂ ਨੂੰ ਇਨ ਜਿੰਦਗੀ ਚ ਹਰ ਇੱਕ ਆਦਮੀ ਨੂੰ ਪ੍ਰੋਬਲਮ ਆਉਂਦੀ ਹੈ ਹਰ ਇੱਕ ਦੇ ਗ੍ਰਿਸ਼ਤ ਵਿੱਚ ਕੋਈ ਨਾ ਕੋਈ ਟ੍ਰੈਜਡੀ ਚਾ ਕੋਈ ਪ੍ਰੋਬਲਮ ਚਾ ਇਸ ਤਰ੍ਹਾਂ ਦੀਆਂ ਹੁੰਦੀਆਂ ਉਹਦੇ ਵਿੱਚ ਉਹਨਾਂ ਦਾ ਇਹ ਸੀ ਵੀ ਸਦਾ ਹੱਸੂ ਹੱਸੂ ਚਿਹਰਾ ਉਹਨਾਂ ਦਾ ਰਹਿੰਦਾ ਸੀ ਖੇੜਾ ਰਹਿੰਦਾ ਸੀ ਮੂੰਹ ਤੇ ਕਦੀ ਉਹਨਾਂ ਨੂੰ ਦੁੱਖ ਤਕਲੀਫ ਹੋਣਾ ਕਦੀ ਮਹਿਸੂਸ ਨਹੀਂ ਕੀਤੀ ਉਹ ਇੱਕ ਵਾਰ ਹੀ ਹੈ surjit singh ਦੇ masr ji ਕਹਿੰਦੇ ਕਿ ਕੋਈ ਮੈਂ ਉੱਥੇ ਅੰਮ੍ਰਿਤਸਰ ਗਿਆ ਤੇ ਜਾਂਦਿਆ ਖਜਾਨ ਸਿੰਘ ਅਰੇ ਉੱਥੇ ਧਰਮਸ਼ਾਲਾ ਚ ਬੈਠੇ ਹੋਏ ਸੀ ਉਹ ਮੈਂ ਕਿ ਸੰਤ ਜੀ ਤੁਸੀਂ ਇੱਥੇ ਕਿਵੇਂ ਦਰਸ਼ਨ ਦੇ ਰਹੇ ਹੋ ਉਹ ਆਂਦੇ ਨੇ ਜੀ ਉਹ ਖਜਾਨ ਸਿੰਘ ਰਾਗੀ ਹੈਗਾ ਨਾ ਉਹ ਮੈਨੂੰ ਇੱਥੇ ਲੈ ਕੇ ਆਇਆ ਆਪ ਵੀ ਦੱਸਣ ਲੈ ਦੱਸਦੇ ਆਪ ਵੀ ਸੀ ਖਜਾਨ ਸਿੰਘ ਰਾਗੀ ਦੇ ਨਾਲ ਆਇਆ ਉਹਦੀਆਂ ਅੱਖਾਂ ਦਾ ਆਪਰੇਸ਼ਨ ਨਹੀਂ ਸੀ ਮੈਨੂੰ ਕਹਿੰਦੇ ਤੂੰ ਨਾਲ ਚੱਲ ਆਖੇ ਉਹ ਇਦਾਂ ਦੇ ਖੁਸ਼ ਤਬੀਰ ਬੰਦੇ ਸੀ ਉਹਨਾਂ ਬਾਰੇ ਹੋਰ ਕੀ ਜਿਆਦਾ ਕਹਿਣਾ ਬਸ ਬਾਕੀ ਉਹਨਾਂ ਦਾ ਗੁਣ ਤਾਂ ਜਵਾਬ ਹੀ ਨਹੀਂ ਸੀ ਅਸੀਂ ਸਾਰੇ ਜਿੰਨੇ ਵੀ ਤਬਲਾ ਪਲੇਅਰ ਇੱਥੇ ਸਾਡੇ ਆਪਣੇ ਨੇ ਉਹਨਾਂ ਤੋਂ ਹੀ ਉਹਨਾਂ ਨੇ ਵਰਸਾਏ ਨੇ ਸਮੇਲੋ ਬੜੀ ਕਿਰਪਾ ਵੀ ਆਜ ਉਹਨਾਂ ਦਾ ਸੀ ਸੰਤਖ ਜਾਨ ਸਿੰਘ ਔਰ ਨਾਲੇ ਸੰਦਰਸ਼ਨ ਸਿੰਘ ਨੇ ਵੀ ਯਾਦ ਕਰ ਰਹੇ ਆ ਦੂਆ ਇਸ ਜੋੜੀ ਸੱਚੇ ਪਾਏ ਕਿਰਪਾ ਕਰਨ ਹੋਰ ਵੀ ਜੋੜੀਆਂ ਬਣਾਣ ਜਿਹੜੀਆਂ ਕਿ ਸਭ ਨੂੰ ਮਸਤ ਕਰ ਦੇਣ ਇਦਾਂ ਦਾ ਸੰਗੀਤ ਆਵੇ ਸਾਨੂੰ ਬੜੀ ਖੁਸ਼ੀ ਹੈ ਔਰ ਧੰਵਾਦ ਹੈ ਤੁਹਾਡਾ ਸਾਰਿਆਂ ਦਾ